तुम वार सच रहया समाए तिसकी कीमत कहीं ना जाए तुमारा रे हम जदों आदमी सतावड़दा ने या तो, जा तो तो सहायक अवस्था है तो जागदा है उनका स्वभाव क्रूर नहीं हुंदा सौम स्वभाव हुंदा है तो कौड़दा आदमी निवस है जोंदा तवे भी बस ਉਸੇ ਆਗੇ ਸੋਚਵੇਂ ਤਾਂ ਉਹਦਾ ਗੁੱਸਾ ਘੈਰਾ ਹੋ ਜਾਂਦਾ ਜੇ ਲੱਗ ਜੇਦੋਂ ਸਹਿਜ ਅਵਸਥਾ ਆਇਆ ਤਾਂ ਸੋਮਵਾਰ ਦੀ ਸੁਭਾਅ ਦੀ ਹੁੰਦਾ ਕਹਿੰਦਾ ਮੈਂ ਮਤਲਬ ਉਹ ਤਾਂ ਬਾਰੇ ਉਹ ਕਿ ਜਨਮ ਲੈਂਦਾ ਹੈ ਸੁਭਾਅ ਜਿਹੜਾ ਨਿਰਮਲ ਹੁੰਦਾ ਉਹ ਉਹ ਅਵਸਥਾ ਚੋਂ ਆਇਆ ਹੁੰਦਾ ਸਭ ਦੀ ਉਸਤਾ ਆਇਆ ਹੁੰਦਾ ਉਹਦੀ ਸੁਰਤੀ ਬਿੰਤੀ ਟਿੱਕੀ ਹੁੰਦੀ ਹੈ ਫਿਰ ਬਟਾ ਆਇਆ ਜਾਂ ਲੱਗਣ ਲੱਗ ਜੀ ਪਹਿਲਾਂ ਨਹੀਂ ਹੁੰਦਾ ਬਲਕਿ ਹਰ ਵੇ ਹੁੰਦਾ ਇਹ ਹੁੰਦਾ ਹੈ ਹਰ ਵੇ ਤੂੰ ਬਾਹਰ ਸੱਚ ਰਿਹਾ ਸਮਾਇ ਤੂੰ ਬਾਹਰ ਦੇ ਦਿਨ ਸੱਚ ਸਮਾ ਗਿਆ ਜਗਾ ਜਗਾ ਸਮਾਇ ਆਪ ਸਮਾਇਆ ਤਾਂ ਜੀਵ ਜਦ ਪੈਦਾ ਹੋਇਆ ਤਾਂ ਰਚਨਾ ਪੈਦਾ ਹੋਈ ਸੱਚ ਨੂੰ ਆਪ ਸਮਾਉਣਾ ਪਿਆ ਝੂਠ ਦੇ ਮਾਇਆ ਦੇ ਵਿੱਚ ਜੇਕਰ ਸੱਚ ਨਹੀਂ ਸਮਾਉਂਦਾ ਮਾਇਆ ਦੇ ਵਿੱਚ ਉਹਨਾਂ ਦੇ ਕੋਈ ਵੀ ਸ਼ਰੀਰ ਨਹੀਂ ਜਿਤਾਇਆ ਜਾ ਸਕਦਾ ਕੋਈ ਜੀਵ ਨਹੀਂ ਜਿਤਾਇਆ ਜਾ ਸਕਦਾ ਸਾਚਾ ਦੇ ਵਿੱਚ ਸੁਭਾਉਣਾ ਵਿਲੇ ਦੇ ਦਿਨ ਨਹੀਂ ਸਕਦਾ ਮੇਲ ਹੁੰਦਾ ਗਿਆ ਤੇ ਸ਼ਰੀਰ ਦੇ ਪੈਦਾ ਹੋ ਗਈ ਜੀਵ ਪੈਦਾ ਹੋ ਗਿਆ ਰਹਿਿਆ ਸਮਾਏ ਹਾਂਜੀ ਕੀਮਤ ਕਹੀ ਨਾ ਜਾਏ ਆਕ ਆਕ ਰਹੇ ਸਭ ਲਿਬ ਲਾਈ ਹਾਂ ਇਸ ਦੀ ਕੀਮਤ ਕਹੀ ਨਾ ਜਾਏ ਹੁਣ ਇਹ ਜਿਹੜੀ ਹੱਥ ਝੂੜ ਵਿੱਚ ਸਮਾ ਗਿਆ ਇਹ ਬਿਆਨ ਤੋਂ ਪਰੇ ਐ ਤਾਂ ਬਿਲਕੁਲ ਇਹਨੂੰ ਕਹਿਣ ਦਾ ਬੜਾ ਤਮਾਸ਼ਾ ਬਾਓ ਬਾਓ ਤਮਾਸ਼ਾ ਅੱਦੋ ਵੱਡਾ ਨਹੀਂ ਤਮਾਸ਼ਾ ਹੋ ਸਕਦਾ ਜੇ ਚੇਤਨ ਜੜ ਦੇ ਵਿੱਚ ਸਮਾਜ ਜਾਵੇ ਉਹ ਜੇ ਕੋਈ ਸਾਹਮਣੇ ਸਮਾਇਆ ਹੋਏ ਇੱਕ ਮਿੱਟੀ ਦੀ ਮੂਰਤੀ ਹੈ ਮਿੱਟੀ ਦਾ ਪੁੱਤਰਾ ਹੈ ਉੱਠ ਕੇ ਤੋੜਦਾ ਆਪ ਹੈ ਗੋਦਨ ਵੀ ਚੱਕ ਲੈਂਦਾ ਕੀ ਕੁਝ ਕਰਦਾ ਹੈ ਉਹ ਸ਼ਕਤੀ ਕਿਵੇਂ ਸਮਾਈ ਹੋਈ ਹੈ ਦੇਚ ਇਹ ਆਦਮੀ ਦੀ ਬੁੱਧੀ ਤੋਂ ਪਰੇ ਦੀ ਗੱਲ ਹੈ ਇਹਦੀ ਕੀ ਬੁੱਧੀ ਤੋਂ ਜਿਆਦਾ ਦੀ ਇਹ ਕਰ ਸਕਦਾ ਹੈ ਥਮ ਇੱਕ ਵਾਰ ਰਾਤ ਨੂੰ ਤੋਂ ਨਿਕਲ ਜਾ ਕੋਈ ਦੁਨੀਆ ਦੀ ਤਾਕਤਾਂ ਨੂੰ ਜੋੜ ਜੇ ਇੱਕ ਵਾਰ ਮਿਕਨ ਉਹਨੇ ਜੋੜੀ ਹੋਈ ਹੈ ਕਾਤੇ ਸਮਾ ਗਿਆ ਇਸ ਤੇ ਵੀ ਝੂਠ ਦੇ ਪਛਮਾਇਆ ਸੀ ਪਰ ਕੋਈ ਖੇੜਾ ਕਾਤੇ ਨ ਜਾਏ ਜਿਹੜਾ ਨੇ ਇਹਨੂੰ ਧਿਆਨ ਨਾਲ ਦੇਖਿਆ ਪਰਖਿਆ ਸੱਤ ਝੂਠ ਨੂੰ ਵੱਡਾ ਵੱਡ ਦੇਖ ਲਿਆ ਜਿਨੀਆਂ ਨੇ ਆਖਿਆ ਸਾਰੇ ਇੱਕ ਹੋ ਗਏ ਆਪਣੇ ਆਪ ਨਾਲ ਜੁੜ ਕੇ ਰਹਿ ਗਏ ਆ ਜਿਹਨੇ ਭਗਤ ਨੇ ਜੁਰਬਾਣੀ ਦੇ ਇਸਾਰੇ ਉਹਨਾਂ ਵਾਸਤੇ ਗੱਲ ਆ ਜੀ ਰਹੇ ਨਿਮਲਾਕੇ ਨਿਮਲਾਕੇ ਹੋ ਕੇ ਹੀ ਰਹਿ ਤੇ ਲੈ ਉਹਨਾਂ ਦੀ ਸੁੱਤੀ ਹੋਈ ਨਹੀਂ ਜੇ ਮੁਜੀ ਰਾਹ ਕਹਿਓ ਫਤਗਣ ਉਹ ਤੇ ਜਨਮ ਲੈਣਾ ਪੈਂਦਾ ਉਹਨਾਂ ਨੂੰ ਠੀਕ ਹੈ ਜੀ ਜਿਸ ਦੇਵੈ ਪਾਏ ਅਗਮ ਅਗੋਚਰ ਲਖਿਆ ਨਾ ਜਾਏ ਜਿਸ ਦੇ ਦਾ ਇੱਕ ਪੱਲੇ ਪਾਇ ਜਿਸ ਨੂੰ ਉਹ ਇਹ ਗਿਆਨ ਦੇ ਦੇ ਸੋਚੀ ਮਿਲ ਜਵੇ ਜਿਸ ਨੂੰ ਇਹਦਾ ਸਮਝ ਆ ਜਾਵੇ ਸਾਚਾ ਜਿਹੜਾ ਐ ਕਹ ਲੋ ਲਵੇ ਜਿਹੜਾ ਆਤਮਾ ਨੂੰ ਦੇਖ ਲਵੇ ਮਾਇਆ ਦੇ ਵਿੱਚੋਂ ਵੱਖਰੀ ਕਰਕੇ ਜਿਸ ਪੱਲੇ ਪਾਇ ਸਭ ਕੁਝ ਪੱਲੇ ਪੈ ਜਾਵੇ ਉਹ ਜਿਹੜਾ ਵਸਤੂ ਲੈਣ ਆਇਆ ਉਹ ਮਿਲ ਜਾਂਦੀ ਹੈ। ਆਗਮ ਆਵੋਚਰ ਲਕਿਆਣਾ ਜਾਏ। ਬਸ ਉਹਦੇ ਪੱਲੇ ਦਾ ਉਹ ਤਾਂ ਸਮਝ ਜਾਂਦਾ ਹੈ ਕੀ ਪੱਲੇ ਤਾਂ ਜਾਂਦਾ। ਸਮਝ ਤਾਂ ਆ ਜਾਂਦੀ ਹੈ ਵੈਸੇ ਦਿਖਾਉਣ ਵਾਲੀ ਗੱਲ ਉੱਥੇ ਕੁਝ ਨਹੀਂ ਹੈ ਦੇਖਦਾ ਕੁਝ ਨਹੀਂ ਦਰਸ਼ਨ ਕੋਈ ਨਹੀਂ ਹੈਗਾ ਕੋਈ ਜਿਵੇਂ ਕਹਿੰਦਾ ਰਬੀ ਉਹ ਤੁਹਾਨੂੰ ਦਰਸ਼ਨ ਹੋ ਗਏ ਤੇ ਆਉਂ ਨਾਮਦੇਵ ਜੀ ਹੋ ਗਏ ਹੋ ਗਿਆ ਉਹ ਉਹ ਨਹੀਂ ਗੱਲ ਹੈ ਦੇਖਿਆ ਉਹਨਾਂ ਲਈ ਵੀ ਕੁਝ ਹੈ ਅੱਖਾਂ ਨਾਲ ਦੇਖਣ ਵਾਲੀ ਚੀਜ਼ ਨਾਲ ਸਮਝਣ ਦਾ ਵਿਸ਼ਾ ਨਾਲ ਦੇਖਣ ਦਾ ਵਿਸ਼ਾ ਨਹੀਂ ਹੈ ਠੀਕ ਹੈ ਜੀ ਗੁਰ ਸ਼ਬਦ ਹਰ ਰਹਾ ਸਮਾਏ ਆਹ ਸ਼ਬਦ ਜਿਹੜਾ ਗੁਰਕਾ ਉਪਦੇਸ਼ ਹੈ ਗੁਰਬਾਣੀ ਉਨੇ ਨਾਲ ਹਰ ਸਮਾਯੋ ਜਿਹੜਾ ਆਦਮੀ ਹੈ ਆਪਣੇ ਅੰਦਰ ਆਪਣੇ ਅੰਦਰ ਇਹ ਹਰ ਦੇ ਵਿੱਚ ਸਮਾ ਕੇ ਰਹਿ ਜਾਂਦਾ ਹੈ ਹਮੇਸ਼ਾ ਲਈ ਆਪਣੇ ਮੂਰ ਦੇ ਵਿੱਚ ਸ਼ਬਦ ਗੁਰਬਾਣੀ ਗੁਰਬਾਣੀ ਗੁਰਗਾ ਫੇਸ ਹੈ ਗੁਰਗਾ ਠੀਕ ਹੈ ਇੱਥੇ ਦੂਸਰੀ ਪੌੜੀ ਦੀ ਸਮਾਪਤੀ ਹੈ ਜੀ ਤੀਸਰੀ ਪੌੜੀ ਸ਼ੁਰੂ ਕਰਦੇ ਹਾਂ ਜੀ ਹਾਂ ਮੰਗਲ ਮਾਇਆ ਮੋਹੋ ਉਪਾਇਆ ਆਪੇ ਸਿਰ ਫਿਰ ਧੰਦੇ ਲਾਇਆ ਗੁਰਬਾਣੀ ਦਾ ਘਟ ਆਇਆ ਆਇਆ ਹੈ ਰਾਮਲ ਸਖੀਆਂ ਮੰਗਲ ਗਾਵੀ ਗੀਤ ਗੋਬੰਦ ਨਾਲ ਕਹਤਾ ਵੀ ਗਲ ਕਾਤੇ ਲਾਉਣੇ ਨੇ ਕੀ ਕਰਨਾ ਜਿਹੜਾ ਮੰਗਲ ਕਹਿੰਦੇ ਨੇ ਹਿੰਦੂ ਧਰਮ ਦੇ ਵਿੱਚ ਮੰਗਲ ਹੈ ਉਹ ਮੰਗਲ ਬਾਹਰ ਦੀ ਖੁਸ਼ੀ ਹੈ ਮਾਇਆ ਦੀ ਮੰਗਲ ਦੂਜਾ ਦਿਨ ਵੀ ਇਹ ਸੋਮ ਤੋਂ ਬਾਅਦ ਦਾ ਪਹਿਲਾ ਦਿਨ ਤਾਂ ਹੈਗਾ ਨਾ ਤੁਹਾਨੂੰ ਸਮਾਦ ਦਾ ਸਭ ਤੋਂ ਆ ਐਤਵਾਰ ਦਾ ਸੁਮ ਸਮਾਦ ਹੈ ਸੋਮਵਾਰ ਨੂੰ ਦੇ ਗੱਲ ਹੈ ਨੂਰ ਹੈ ਤੇ ਮੰਗਲ ਦੇ ਵਿੱਚ ਮਾਇਆ ਪੈਦਾ ਹੋਗੀ ਮਾਇਆ ਮੋਹ ਪਾਇਆ ਮਾਇਆ ਮੋਹ ਉਪਾਇਆ ਲਿਖਿਆ ਜੀ ਹਾਂ ਮੰਗਲ ਹੀ ਮੰਗਲ ਵਾਸਤੇ ਕੁਝ ਵਾਸਤੇ मन खोज सीधा माया मोह मोह है ना माया में धरना कोई नहीं चोंदा हूं ठीक है अच्छा पैदा हुई ना माया जी माया मोह पाया आपे फिर चलता देला सारे नु लाया है फिर ते आप है आप सरते है सारे ठंडे लगे हैं होके उदय कल आप बुझाए सोई बुझै कुरके शब्द दर घर सुज्जै ਆਪ ਕੋ ਕੁਝ ਆਏ ਕੋਈ ਬੁਝੇ ਪਰ ਇਹ ਗੱਲ ਜਿਹੜੀ ਪਿੱਛੇ ਗਈ ਹੈ ਸਿਰਦਰ ਧੰਦੇ ਲਾਇਆ ਆਪਣੇ ਸਿਰਦਰ ਧੰਦੇ ਲਾਇਆ ਇਹ ਗੱਲ ਨਹੀਂ ਰੋਕ ਮੰਦੇ ਹਾਂ ਇੱਕ ਮੱਤ ਤੋਂ ਬਿਨਾਂ ਆ ਗੁਰਮੱਤ ਤੋਂ ਬਿਨਾਂ ਕੋਈ ਮੱਤ ਦੁਨੀਆ ਦੀ ਇਹ ਗੱਲ ਨਹੀਂ ਮੰਦੀ ਜਵਾਨੀ ਕਲਾਮੀ ਚਾਹ ਮੰਨ ਲੈਂਦੇ ਨੇ ਮੱਤ ਵਿੱਚ ਨਹੀਂ ਹੂੰ ਤੁਹਾਡੇ ਤੇ ਪੁਨਰਪਾ ਮੰਨਦੇ ਨੇ ਤੇ ਪੁਨਰਪਾ ਮੰਨਦੇ ਨੇ ਇਹਦਾ ਮਤਲਬ ਆ ਮੈਂ ਕਰਦਾ ਆ ਮੈਂ ਕਰ ਸਕਦਾ ਇਹ ਵੀ ਮੰਨਦੇ ਇਹ ਬੁਝਣ ਵਾਲੀ ਗੱਲ ਹੈ ਜਿਹਨੇ ਬੁਝਣ ਆ ਕੇ ਸਿਰ ਸਿਰ ਧੰਦੇ ਲਾਇਆ ਉਹੀ ਕਰਾਉਂਦਾ ਸਭ ਕੁਝ ਜਿੱਤਾ ਕਰਦੇ ਹੀ ਕਰਦੇ ਹੈ ਉਹਦੀ ਮਰਜ਼ੀ ਨਾਲ ਇਹ ਜਿਹਨੂੰ ਆਪ ਉਹ ਭਜਾਵੇ ਸ਼ਬਦ ਦਰ ਕਰ ਸੁਝੇ ਇਹ ਦੇ ਨਾਲ ਉਹਨੂੰ ਔਰ ਆਪਣਾ ਘਰ ਅਸਲੀ ਘਰ ਅਸਲੀ ਦਰ ਦਸਵਾਂ ਦੁਆਰ ਔਰ ਜਿਹੜਾ ਨਿਜ ਘਰ ਉਹ ਆਂਦੀ ਸੋਚੀ ਹੋ ਜਾਂਦੀ ਅਸਲੀ ਮੇਰਾ ਘਰ ਕਿੱਥੇ ਹੈ ਜਿੱਥੇ ਮੈਂ ਜਾਣਾ ਹੋਣ ਚਾਹੇ ਜੇਕਰ ਪਰਮਾਨੈਂਟ ਰਹੇ ਹੈ ਪਰ ਯੋ ਕਰਕੇ ਨਾ ਉਹ ਦਰ ਕਿਹੜਾ ਸੋ ਦਰ ਕਿਹਾ ਸੋ ਕਰਕੇ ਆ ਇਹ ਗੱਲ ਤਾਂ ਤੁਹਾਨੂੰ ਜਵਾਬ ਮਿਲ ਜਾਂਦਾ ਸਮਝ ਆ ਗਿਆ ਇਹ ਬੁੱਝਲ ਗੱਲ ਕਿ ਲਾਇਆ ਹੈ ਹੁਕਮ ਨਾਲੇ ਅਸੀਂ ਕਰਦੇ ਹਾਂ ਉਹ ਉਸੇ ਦਾ ਚੱਲਦਾ ਹੈ ਕਰਦੇ ਅਸੀਂੇ ਕਰਾਉਂਦਾ ਹੋਇਆ ਇਹ ਕਰਕੇ ਕੋਨ ਪਾਪ ਵਾਲੀ ਕੋਈ ਥਲੇਖਾ ਹੀ ਹੈ ਪੁੰਨ ਪਾਪ ਵਾਲੀ ਕੋਈ ਗੱਲ ਨਹੀਂ ਪ੍ਰੇਮ ਤਗਤ ਕਰੇ ਲਿਵ ਲਾਏ ਹਉਮੈ ਮਮਤਾ ਸ਼ਬਦ ਜਲਾਏ ਇਹੋ ਕੀ ਕਰਦਾ ਪ੍ਰੇਮ ਸਾਰਿਆਂ ਨਾਲ ਪ੍ਰੇਮ ਕਰਦਾ ਸਾਰੇ ਸੰਸਾਰ ਨਾਲ ਪ੍ਰੇਮ ਕਰਦਾ ਪ੍ਰੇਮ ਕਰਨਾ ਹੀ ਭਗਤੀ ਹੈ ਭੱਤੀ ਨਹੀਂ ਕੁਝ ਹੈ ਜੀ ਪ੍ਰੇਮ ਕਰਨਾ ਹੀ ਭਗਤੀ ਹੈ ਪ੍ਰੇਮ ਭਗਤੀ ਪ੍ਰੇਮ ਹੀ ਭਗਤੀ ਹੈ ਪ੍ਰੇਮ ਕਰਨਾ ਹੀ ਭਗਤੀ ਕਰਨਾ ਹੈ ਕਰੇ ਲਿਵ ਲਾਏ ਨੇ ਲਾ ਕੇ ਇੱਕ ਮਾਨੀ ਸਿੱਖਤ ਹੋ ਕੇ ਸਭ ਨਾਲ ਪ੍ਰੇਮ ਕਰਦਾ ਉਹ ਦਿਖਾਵੇ ਦਾ ਪ੍ਰੇਮ ਨਹੀਂ ਕਰਦਾ ਉਹ ਵਾਕੀ ਪ੍ਰੇਮ ਕਰਦਾ ਅੰਦਰੋਂ ਵੀ ਕਰਦਾ ਬਾਹਰੋਂ ਵੀ ਕਰਦਾ ਹਉਮੈ ਮਮਤਾ ਸ਼ਬਦ ਜਲਾਏ ਹਉਮੈ আর ਮਮਤਾ ਨਹੀਂ ਪ੍ਰੇਮ ਕਰਨੰਦੀਆਂ ਦੋ ਚੀਜ਼ਾਂ ਇਹ ੜਕਾ ਪ੍ਰੇਮ ਦੇ ਵਿੱਚ ਇਹ ਦੋਏ ਚੀਜ਼ਾਂ ਜਾਣ ਦਿੱਤੀਆਂ ਆਪਣੇ ਅੰਦਰੋਂ ਨੇ ਕਿਹਦੇ ਨਾਲ ਗੁਰਬਾਣੀ ਦੀ ਬੰਦਤ ਨਾਲ ਗੁਰਬਾਣੀ ਦੀ ਸੋਚੀ ਨਾਲ ਦੋਏ ਚੀਜ਼ਾਂ ਜਾਣਦੀਆਂ ਜਿਹੜਾ ਪ੍ਰੇਮ ਕਰਕੇ ਅੜਿੱਕਾ ਸੀ ਉਹ ਮੇਰੇ ਮਮਤਾ ਸੀ ਦੋੇ ਖਤਮ ਕਰਤੀ ਜਿਹੜਾ ਏ ਯਾਲ ਦਿੱਤੀ ਇਹ ਤਾਂ ਪ੍ਰੇਮ ਹੋ ਸਕਦਾ ਪਰ ਮਨ ਨਹੀਂ ਹੋ ਸਕਦਾ ਉਹ ਝੂਠੀ ਪ੍ਰੀਤ ਹੈ ਸੰਸਾਰ ਦੀ ਝੂਠੀ ਬੇਚੀ ਪ੍ਰੀਤ ਠੀਕ ਹੈ ਜੀ ਇੱਥੇ ਤੀਸਰੀ ਸਮਾਪਤੀ ਹੈ ਜੀ